जय प्रसाद सुनै कर्ण नाद जय प्रसाद देखैं तिसमाद जय प्रसाद सुनै कर्ण नाद क्यों भाई करणु क्यों करे सुनता आवाज येले असर थोड़ी शक्ति है चौध पूरा अपन पैदा कर लेता ये जे ज्यादा कृपा है वो सुनता तो भैया बेहोश हो जाना फिर तो नहीं सुनता ਜੋ ਦਾ ਹੁੰਦਾ ਹੈ। ਬੇ ਉਹ ਜੋ ਜਾਂਦਾ ਫਿਰ ਨਹੀਂ ਸੌਂ ਜਾਂਦਾ ਫਿਰ ਨਹੀਂ ਸੌਂਦਾ। ਉੱਠੀਂ ਹੋ ਜਾਂਦਾ। ਆ ਹਿਉਂ ਕੀ ਆਇਆ ਰੇ ਸੋਗ ਨੂੰ ਮੰਨਣੀ ਆ ਸਾਰੀ ਗੱਲ ਆ ਰਹੀ। ਹਾਂ ਮਨਪੋਰ ਜਗਤੀਆਂ ਐ ਸੋਹਣਾ ਨਹੀਂ। ਕੱਲ ਨੂੰ ਜੇ ਬੇਕਾਬੂ ਵਾ ਮਨ ਸਾਡਾ ਸਾਥੇ ਬੁੱਤੇ ਬੁੱਤੇ ਕਦਹਲ ਬੇਕਾਪੂ ਹਾਜੋਂ ਬੇਕਾਪੂ ਆੰਦਲੇ ਜੀ ਕਾਪੂ ਆਪਣੇ ਆ ਕੰਨ ਖਾਏ ਅਕਲ ਵੀ ਕਾ ਅਕਲ ਤੇ ਕੰਮ ਦਿਮਾਗ ਆਪਣੇ ਕਾਪੂ ਹੈ ਦਿਮਾਗ ਤੇ ਕੰਮ ਲੈਂਦਾ ਆਪਾਂ ਕਹਿੰਦੇ ਅਗਰ ਤੇ ਨਹੀਂ ਕੰਮ ਲੈਂਦਾ ਇਹ ਸਾਡੇ ਕਾਪੂ ਦੀ ਚੀਜ਼ ਹੈ ਰੋਟੀ ਉਹ ਨਹੀਂ ਲੱਗੀ ਸਾਡੇ ਵਿੱਚ ਆਬੂ ਖਾਲੀ ਹਜਮ ਨਹੀਂ ਹੋਈ ਪਤਾ ਦੀ ਜੋਦੀ ਹੋਈ ਦੋਵੇਂ ਸਾਡੇ ਤਾਂ ਹਜਮ ਨਹੀਂ ਹੋਈ ਖਾ ਤੂੰ ਸੰਗਤ ਹਜਮ ਨਹੀਂ ਕਰਦਾ ਸਭਾ ਅੰਦਰ ਕੀ ਕੀ ਬੰਦਾ ਗਿਰਮਣਾ ਉਹ ਤਾਂ ਉੱਥੇ ਫਿਰ ਸਮੁੰਦਰ ਹੈ ਹਾਈ ਵੀ ਲੈ ਅਡਰ ਨਾਲ ਜਾ ਤੇ ਖਾਲੀ ਹੋਣ ਲੱਗਿਆ ਉਹ ਪੱਤਰ ਕਹਿੰਦੇ ਛੇਤੀ ਕਰ ਤਾਂ ਕਹਿੰਦਾ ਤੇ ਇਹ ਕੋਈ ਜਲਦੀ ਪਹੁੰਚੇ ਨਾ ਬੇਗਰਾਮ ਪਹੁੰਚੇ ਸੱਚਾ ਖੜਾ ਹੁੰਦਾ ਹੈ ਜਗਲਾ ਕਰਦਾ ਪੱਥਰ ਘਾਦੇ ਸੁਬੀਰ ਤਾਂ ਹੀ ਗੱਲ ਹੈ ਬੰਦਾਂ ਦਾ ਸਾੜੀ ਹੋਈਆਂ ਉਹ ਜ਼ਿਆਦਾ ਬਰੀਕੀ ਨਾਲ ਆਪਾਂ ਖੋਡੀਆਂ ਨਹੀਂ ਹੁੰਦੀ ਚਲੋ ਆਖਰੀ ਪੜੇ ਜਾ ਕੇ ਅਸ਼ਤਪਤੀ ਦੇ ਆਖਰੀ ਪੜੇ ਜਾ ਕੇ ਗੱਲ ਕਾਫੀ ਉੱਥੀ ਹੋ ਜਾਂਦੀ ਹੈ ਬਹਿਲੇ ਨਾਲੋਂ ਪਹਿਲੇ ਤਾਂ ਸਾਟ ਕਰਦੇ ਨੇ ਤਾਂ ਮੋٹے ਮੋٹے ਗੱਲਾਂ ਆ ਗਈਆਂ ਰਿਆ ਕਰ ਉਹ ਵੀ ਆਣਾ ਜੇ ਉਹ ਪਹਿਲਾ ਦਲਿਆ ਹੁੰਦਾ ਦੂਵੀਂ ਵਾਰ ਬਾਂਦਰ ਹੋ ਜਾਤਾ ਹੋ ਜਾਂਦਾ ਚਾਰ ਬਲੇ ਥੋਕੇ ਹੁੰਦੇ ਨੇ ਚਾਰਵੇਂ ਤੇ ਜਾਂਦੇ ਬ੍ਰੀਕ ਲੱਗ ਜਾਂਦੇ ਨੂੰ ਫਿਰ ਇੱਕ ਵਾਰ ਥੋੜਾਇਆ ਕਢਾਈ ਜਾਂਦਾ ਗਾਲਾ ਉਹਦਾ ਬ੍ਰੇਕ ਹੋ ਜਾਂਦਾ ਹਾਂ ਜੇ ਪ੍ਰਸਾਦ ਸੁਣਾ ਕੰਨਨਾਦ ਜੇ ਪ੍ਰਸਾਦ ਦੇਖ ਹੀ ਬਿਸਮਾਜ ਦੇਖਣ ਤੇ ਜਿਹੜੇ ਸਤਿਪੰਥ ਕੇ ਖੰਡ ਲਵਦਾ ਦੇਖ ਨਹੀਂ ਆ ਰੱਖਣ ਦੀ ਗੱਲ ਹੈ ਜਿਹੜੀ ਸਤਿ ਪ੍ਰਸਾਦ ਨਾਲ ਅੰਸਰਲਾ ਨਾਲ ਥੁਟਦਾ ਹੈ ਸੁਦਰ ਸੁਤਰ ਆਤਮ੍ਰਤੀਵਾਸ ਹੁੰਦਾ ਹੈ ਔਰ ਜਿਹੜੇ ਉਹਨੂੰ ਬੁੱਝ ਕੇ ਲਾਪੇਸ ਬਾਦ ਹੁੰਦੇ ਤਾਂ ਅਲਟਰ ਸੋਚੀ ਆਉਂਦੀ ਉਹ ਗੱਲ ਹੈ ਆਪ ਵੀ ਆ ਜਾਣ ਦੀ ਜੇ ਜਾਗ ਲੱਭੀ ਸੋਚੀ ਆ ਜਾਂਦੀ ਹੈ ਉਹ ਜਿਹੜਾ ਸੁਮਾਸ ਦੇਖ ਦੇਖ ਦਾ ਅੰਦਰੋਂ ਦੇਖਣ ਸੁਬਾਹ ਜੇ ਪ੍ਰਸਾਦ ਬੁੱਲ ਹੈ ਅਮਰਦ ਰਸਨਾ ਫੇ ਆਦੀ ਦੀ ਕਿਰਪਾ ਨਾਲ ਉਹੀ ਗੱਲ ਬੋਲ ਕੇ ਦੱਸਦਾ ਮਤਲਬ ਇਹ ਆਪਣੇ ਦੇ ਆ ਗਏ ਆਪਣੀ ਗੱਲ ਦਾ ਹੈ ਜੀ ਅੰਤ੍ਰਿਕ ਹਾਲ ਜਦ ਆਸਾਤ ਬੋਲਿਆ ਜਾਂਦਾ ਉਹਨਾਂ ਦਾ ਜਿਹੜੇ ਬੈਠੇ ਨੇ ਦੂਜੇ ਬੋਲਦੇ ਜੇ ਪੋਤ ਦਾਨ ਕਰਦੇ ਉਹਨੂੰ ਬਦੋ ਬਿਦਾ ਉਹ ਕਹਿੰਦਾ ਹੈ ਤਾਂ ਹੀ ਜੇ ਕੈਲ ਮੰਦਰ ਸ੍ਰੀ ਚਰਦਾ ਚਲਦਾ ਫਿਰਦੀ ਆਪਣੇ ਆਪਣੇ ਦੁੱਖ ਤੇ ਲੱਗਦੇ ਜਲੰਕੇ ਸੀ ਆਪਣੇ ਆਪਣੇ ਨਾਮ ਦੇ ਸਦਸ ਸੀ ਗੁਰੂ ਗ੍ਰੰਥ ਸਾਹਿਬ ਜੀ ਅਸੇ ਜਦ ਪਰਮੇਸ਼ਰ ਦਾ ਹਲ ਕਰਦਾ ਉਹ ਆਪਣਾ ਆਪਣਾ ਆਪਣੇ ਆਪਣੇ ਨੂੰ ਗੁਰੂ ਲੱਗਿਆ ਹੈ ਇਹਦਾ ਦਾਸ ਲੱਗਿਆ ਹੈ ਕਿ ਉਹ ਦਾ ਇਹ ਉਹਦੀ ਡਿਸਕਸ਼ਨ ਨਾਲ ਉਸ ਤਿੱਦਲ ਤੋਂ ਡਿਸਕਸ਼ਨ ਆ ਗੱਲ ਕਹਿ ਕੇ ਉਹ ਉਹ ਕਹਦੇ ਲੋਕੀ ਜਾਂ ਉਹ ਤਾਂ ਇਹ ਕੁਝ ਹੈ ਵੀ ਜਿਹੜਾ ਚਾਹੀਦਾ ਹੈ ਇਸ ਕਰਕੇ ਉਹ ਬਾਣੀ ਬਧੀ ਰੱਖ ਸਕੇ ਜਿਹੜੀ ਅੰਦਰ ਰੱਖੀ ਸਭ ਦਾ ਟਿਕਾਲ ਕਿੱਥੇ ਜਬੀ ਤਾਂ ਅੱਜ ਹੀ ਬਾਣੀ ਰੱਖ ਰਹੇ ਆ ਉਹ ਸ਼ਰਤਾਂ ਪੂਰੀਆਂ ਕਰਕੇ ਜਦੋਂ ਜੇ ਪ੍ਰਸਾਦ ਤੁਮਰਾ ਪਰਸਨਾ ਉਹਨੇ ਅੰਦਰ ਸਮਝੀ ਇਹ ਸ਼ੁਰੂ ਸੀ ਪਹਿਲਾਂ ਜੇ ਕੋਈ ਸੁਣੇ ਕਰਨ ਨਾਮ ਉਸ ਵੀ ਪਹਿਲਾਂ ਰੋਕ ਤਾਹੀ ਕਿ ਜੇਲਾ ਮੈਂ ਦਾਨਪੁਰ ਕਰਦਾ ਹਾਂ ਜੇ ਪ੍ਰਸਾਦ ਕਰੇ ਤਰੇ ਬਹੁਤ ਬਹੁਤ ਮਨ ਆੜ ਕਰਦਾ ਸਕਦਾ ਹਾਂ ਇਥੋਂ ਜੇ ਆਪ ਰੱਬ ਚਲਾਉਣ ਨੂੰ ਵੀ ਸ਼ਬਦ ਹੀ ਸ਼ਬਦ ਜਿਆ ਬੋਲੇਗਾ ਨਾ ਉਹ ਅਣੀ ਗਣਾ ਦੂਆ ਵੀ ਦਾਨਪੁਰ ਕਰਦੇ ਹਾਂ ਦੂਆ ਨਾ ਵੀ ਹੈ ਉਹ ਵੀ ਗੁਰੂ ਦੀ ਹੈ ਕਹਾਣੀ ਲੱਸੀ ਹੋਈ ਆਪਣੀ ਹੀ ਹੈ ਸ੍ਰੀ ਰਾਮਦਾਸ ਦੀ ਕਹਾਣੀ ਗੁਰੂਆਂ ਵਾਲੀ ਗੁਰੂ ਦਾ ਕਹਿੰਦਾ ਇਹ ਗੁਰੂ ਰਾਮਦਾਸ ਦਾ ਕਹਾਣੀ ਹੈ ਆ ਅਧੀ ਨਿਆ ਹੈ ਤੇ ਵੀਣਿਆ ਦਾ ਸੀ ਬੋਲੀ ਵੀਣ ਵਾਲੀ ਬੋਲੀ ਸਾਡੇ ਘਰ ਬਾਰੇ ਆਹ ਜਬਦੀ ਗਾਦੀ ਹੈ ਚਾਹਦੀ ਹੈ ਫੱਲ ਲੱਗੀ ਲੱਗੀ ਜੀਦੀ ਕਰਪਾਣਾ ਚੱਲਦਾ ਸੀ ਕੋਈ ਉਹ ਧਾਨਪੁਰ ਰੋਟੀ ਖਾ ਗਿਆ ਪਰ ਲੋੜ ਦਾਣੇ ਆ ਕਪੜੇ ਅੰਦਰ ਕੋਸ਼ਾਂ ਲਗਾਉ ਲੋੜ ਬੰਦ ਦੇਰ ਦੇ ਸੀ ਇਹ ਰੋਜਾ ਜਿਆਦਾ ਚੀਜਾ ਨਾ ਮੈਂ ਕਿਹਾ ਕੀ ਕਰੀ ਲੋੜ ਬੰਦ ਦੇਤੀ ਉਹ ਪੁੱਤ ਅਗਲਾ ਤਾਂ ਕਹਿੰਦਾ ਹੀ ਆ ਅਸੀ ਸਾਧਾਈਆ ਜਿਹੜੀ ਬਾਦੂ ਕੀ ਪਤਾ ਜਰਾ ਜਿਵੇਂ ਅਸੋ ਦਾ ਲੋੜ ਨੂੰ ਦੱ ਉਹ ਕਹਿੰਦਾ ਜੇ ਪ੍ਰਸਾਦ ਕਰੇ ਪੁੱਤ ਬੋਧਾਨ ਨੂੰ ਰੁਮਨ ਆੜ ਪੈਰ ਤਰ ਇਸੋ ਤੇ ਹਾਂ ਆਪਣੇ ਮਨ ਦੀ ਗੱਲ ਕਰਨਾ ਕਿ ਠੀਕ ਹੈ ਦਸਤੀ ਕਾਲੋਂ ਮੈਂ ਵੀ ਜੇ ਇਹ ਨਾਲ ਰੱਖੀ ਗੱਲ ਧਿਆਨ ਵਿੱਚ ਆ ਬਾਣੀ ਦੇ ਉੱਤਰ ਦੀ ਗੱਲ ਇਥੇ ਨਹੀਂ ਜੇ ਪ੍ਰਸਾਦ ਬੋਲੇ ਅਮਰ ਹਾਂ ਉਹ ਬੋਲ ਸਮਝਦਾ ਮੋਲਦਾ ਜੇਹ ਪ੍ਰਸਾਦ ਸੋਖ ਸਹਿਜ ਸੁਣੋ ਸੋਖ ਸਹਿਜ ਸਹਿਜ ਯਾਤਰ ਸਭਾ ਸੋਖ ਨਾਲ ਬਸ ਜੇਹ ਪ੍ਰਸਾਦ ਹਸ ਕਰ ਚੱਲਣਾ ਜੇਹ ਪ੍ਰਸਾਦ ਸੰਪੂਰਨ ਹਾਲ ਜੇਹ ਪ੍ਰਸਾਦ ਹਸ ਕਰ ਚੱਲਣਾ ਹੱਸ ਕੇ ਨਹੀਂ ਜਾਂਦਾ ਹਸ ਤਾ ਹੱਥਾਂ ਚੱਲਦੇ ਨੇ ਹਸ ਤਾ ਕਲ ਚੱਲਣ ਅੱਠ ਦੋਏ ਔਰ ਉਸ ਤਰ੍ਹਾਂ ਜੇਕਰ ਬੰਦ ਪਾਲੇ ਅੱਧੇ ਵੀ ਕਲੇ ਵੀ ਦੋਏ ਜਿੱਦ ਕਰਪਨ ਦੇ ਹਾਸਾ ਕਦੋਂ ਹਾਸਾ ਨਹੀਂ ਚੱਲਦਾ ਹਾਂ ਹਾਸਾ ਹਾਸਾ ਹੱਥ ਨੂੰ ਬੈਠ ਹਾਸਾ ਲਿਖਾ ਜੀ چلਦੇ ਨੇ نا کب ਕਰਦੇ ہیں اگر کب کر دی ہے શરીર ਕਰਦਾ کردا ہے বুদ্ধি بھی کم کر دی ہے اسیر بھی کم کردا جی دی کر پڑھنا تو یہاں دی ود ماری دی جاتی ہے پاگل ہو جاتا ہے تے یہاں دا શરીર بھی کم کردا وہ بھی جھانے ਉਹ ਜਿਹੜਾ ਕਹਿਣਾ ਨਾ ਉਹ ਮੁਕੁੱਟੇ ਤੇ ਨਹੀਂ ਇਹ ਉੱਤਮ ਸੁਤ ਗਿਆਨ ਆਹ ਗੱਲ ਹੈ ਉਹ ਉਹ ਹਮਲ ਦਾ ਆਦਾ ਇਤੋਈ ਰਹਦੈਂ ਕਿਵੇਂ ਜਿਵੇਂ ਜਿਵੇਂ ਜਿਵੇਂ ਜਲੀ ਗਈ ਸਭ ਜੀ ਹੱਥ ਚਲੀ ਗਈ ਉਹ ਦੇਖ ਹੱਥ ਵੀ ਚਲੀ ਗਈ ਜੀਬਾਨ ਵੀ ਚਲੀ ਗਈ ਉੱਤੇ ਵੀ ਜਲੀ ਗਈ ਇੱਕ ਤਿਹਦੀ ਕਰ ਪਾਣਾ ਚੰਦ ਦੇਣ ਅੱਪਾ ਸਾਰੇ ਜਾਣ ਦੇਣ ਚਲਾਇ ਆਪਣ ਜੁਆਇ ਤੇ ਚੱਲਦੇ ਜਾਨਦੇ ਆਪਾਂ ਪਰ ਜੇ ਉਹਦੀ ਕਿਰਪਾ ਹਰ ਵਕਤ ਮੱਦੀ ਜਾਵੇ ਤੇ ਚੱਲਦੇ ਵਧੀਆ ਰਹਿੰਦੇ ਨੇ ਕਿ ਭੁੜਿਆ ਰਹੇ ਫਿਰ ਫਿਰ ਦਫਤਰ ਪਾਇੰਦੋਂ ਵਿੱਚ ਇਹ ਭੁੜੇ ਬੈਠ ਆਣ ਉਹ ਤੇਰ ਪਾਣੀ ਪੀਵੇ ਗੜੀ ਸਪਨੋਂ ਅਗਦਰ ਬਹਿ ਜਿਦਾਂ ਝੋਪੀ ਹੋ ਜਾਂਦਾ ਰਾਜਰ ਪਾਣੀ ਲੀਕਰ ਗਾਵੇ ਸਤ ਮਾਦਵ ਖਾਣ ਜਾਵੀਂ ਪਰ ਰਵੀ ਜਾਂ ਤੂੰ ਆ ਜਾ ਨਾ ਇਸ ਕਰਕੇ ਧਿਆਨ ਦੀ ਲੋੜ ਹੈ ਧਿਆਨ ਧਿਆਨ ਵੀ ਰੱਖ ਕੇ ਚੱਲਦੇ ਕੌਣ ਨੇ ਚਲਾਉਂਦਾ ਕੌਣ ਹੈ ਕਿੰਨੇ ਚੱਲਦਾ ਹੈ ਤੇ ਬਣਦੀ ਹੈ ਧਿਆਨ ਕੀ ਧਿਆਨ ਮੈਂ ਤੇ ਹਮ ਧਿਆਨ ਤਾਂ ਧਿਆਨ ਧਿਆਨ ਵਿੱਚ ਗਿਆਨ ਤਾਂ ਧਿਆਨ ਵਿੱਚ ਗਿਆਨ ਤਾਂ ਲੱਭਦਾ ਧਿਆਨ ਵਿੱਚੋਂ ਗਿਆਨ ਤਾਂ ਲੱਭਦਾ ਜੇ ਆਪਣੇ ਸੋਲਜੀ ਦੇ ਆਨ ਹੋਵੇ ਕੋਈ ਤੁਹੂ ਦੇ ਆ ਧਿਆਨ ਨਾਲ ਉਤਲ ਜਾਣਾ ਪੜਾ ਜੇ ਸੋਣ ਨੂੰ ਕੋਈ ਜਾਈਏ ਧਿਆਨ ਨਾਲ ਦੋਸਤੀ ਦੇ ਪਣ ਧਿਆਨ ਤਾਂ ਹੁੰਦਾ ਹੈ ਧਿਆਨ ਰੱਖ ਲੈ ਜੇ ਲੱਭੀ ਸ਼ਬਦ ਨਹੀਂ ਉਪਦੇਸ਼ ਨਹੀਂ ਦਿਓ ਇਹ ਫਲ ਛਾਦ ਸੰਪੂਰਨ ਫਲ ਹੈ ਇਹ ਪਰਥਾਲ ਸੰਪੂਰਨ ਫਲ ਹੈ ਸਪੂਰਨ ਫਲ ਲੱਗਦੇ ਨਾ ਤਾ ਕੱਚੇ ਦੀ ਛੱਡ ਸੰਪੂਰਨ ਪੱਕੇ ਪੂਰੇ ਕੱਚੇ ਵੀ ਚੜ ਜਾਂਦੇ ਸੰਪੂਰਨ ਫਲਾਂ ਫੁੱਲ ਕੋਈ ਟਾਣੀ ਨਹੀਂ ਰਹੀ ਪੱਤੇ ਵੀ ਨਹੀਂ ਹੜ ਵੀ ਪੂਰਾ ਹੜ ਵੀ ਪੂਰਾ ਹੜ ਵੀ ਪੂਰਾ ਤੇ ਉਹ ਵੀ ਪੂਰਾ ਭਰਿਆ ਹੋਇਆ ਲੱਦਿਆ ਪਿਆ ਅੱਬ ਕਹਿੰਦਾ ਫੜ ਲਾ ਲੱਦਿਆ ਪਿਆ ਵੀ ਸੂਰਨੋ ਜੋ ਹਰ ਫੜ ਕੰਪਲੀਟ ਹਰ ਗੱਲ ਕੰਪਲੀਟ ਹਰ ਗੱਲ ਦਾ ਅਰਥ ਕੋ ਕੋਈ ਯਾਦ ਵੀ ਚਾਹਣਾ ਨਹੀਂ ਕੋਈ ਅਪ ਗਾਣਾ ਨਹੀਂ ਹੈ ਜੀ ਪੂਰਾ ਹਰ ਭਲਾ ਸੋ ਉਹਨਾਂ ਭਾਲਾ ਹਰੇ ਕੇ ਕੋਈ ਹੈ ਜਿਹੜੀ ਮੀਮਾ ਜਿਹੜੀ ਮੀਮਾ ਜਿਹੜੀ ਪੂਰਾ ਭਰਾ ਅਜੂ ਦਾ ਸਾਲੀ ਕਰਕੇ ਇਹ ਜੋ ਸਭੇ ਧੋਖ ਪ੍ਰਾਪਤ ਆਹਾ ਜੇ ਉਹ ਸਾਧ ਪਰਮ ਗਤੀ ਪਾਵੇ ਇਹ ਪ੍ਰਸਾਦ ਪਰਮਪਤੀ ਕਾਮ ਪਰਮਪਤੀ ਰੁਕਦਾ ਹੀ ਨਹੀਂ ਸੱਤ ਕਾਮਾ ਪਰਮਪਤੀ ਦਾ ਹਾਂ ਕਿ ਗਾਂਵਾਂ ਵਾਲੀ ਦ੍ਰਿਸ਼ੀ ਹੋਈ ਜਿਸੀ ਰੁਕਦੀ ਨਹੀਂ ਜੀ ਜਤੀ ਜਿੱਦ ਤੱਕ ਰੁਕ ਗਿਆ ਤੇ ਝੱਪੜ ਬੰਨ ਗਿਆ ਤੇ ਦਰਿਆ ਚੱਲਦਾ ਹੈ ਸਮੁੰਦਰ ਜਾਂਦਾ ਵਧਦਾ ਨਹੀਂ ਤੇ ਰੁਕਦਾ ਵੀ ਹੈ ਰੁਕਦਾ ਵੀ ਸਮੁੰਦਰਾਂ ਲੈ ਜਾ ਕੇ ਰੋਕਦਾ ਵੀ ਰੁਕਦਾ ਦਰਿਆ ਪਰੋ ਇਹ ਪਰਮਪਤੀ ਨੂੰ ਸਮੁੰਦਰੇ ਰੋਕਦਾ ਦਨ ਕਾਮ ਕਿੱਥੇ ਜਾਣਾ ਵੇ ਜਾਚੇ ਉਹ ਬੇਰ ਆਰਦਾ ਦੀ ਕੋਪਲਾ ਬੱਚੇ ਉਹ ਐਸਾ ਵਿੱਚ ਆਉਣ ਲੱਗ ਜਾਂਦਾ ਜਾਂ ਫਿਰ ਜਾਂਦਾ ਕਿਤੇ ਬਲਦੀ ਸਲਾਮਤ ਉੱਧਰ ਪਾਣੀ ਵਸੁੰਦਾ ਜਾਂਦਾ ਫਿਰ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਤੋਂ ਪਰਮਗਤੀ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਜੇ ਪ੍ਰਸਾਦ ਦੀਏ ਕਿਰਪਾ ਨਾਲ ਸੁਖ ਔਰ ਸਹਿਜ ਕਿ ਕਿ ਆਇਆ ਸੁਪਨਾ ਆਇਆ ਕਿ ਕਿ ਆਇਆ ਸਾਇਦ ਉਹ ਤਾਂ ਜਾਗਰਤ अवस्था ਦਾ ਸੁਪਨਾ ਹੋ। ਕਿ ਕਿਸਾਨ ਨੂੰ ਨਹੀਂ ਜਾਗ ਸੁਪੋਤਾ ਨਹੀਂ ਦੇ ਵਿੱਚ ਵੀ ਸੁਪਨ ਮੈਂ ਤਾਂ ਸੁਪਨਾ ਸਮਝ ਲੈਂਦਾ। ਦਾ ਜੀ ਬੜਾ ਤਾਜ਼ਾ ਹੋ ਕੇ ਉੱਠਦਾ। ਉਸੇ ਦੀ ਸੁਪੋਤਾ ਕਿ ਜਾਰੇ ਤੇ ਜਾਗਦੇ ਦਾ ਜੀ ਜਾਗਦੇ ਬਣਿਆ ਰਹਦਾ। ਜਾਗਦੇ ਵੀ ਇਹ ਜਾਗਦੇ ਦਾ ਸੁੱਖ ਸੁਤੇ ਸੁਤੇ ਸੁਭਰ ਉਹ ਜਾਗਦੇ ਵਧੀਆ ਵਧੀਆ ਉਹ ਤੁਮ ਹੋ ਰਾ ਉਹ ਤੁਮ ਸਰੀਰ ਦਾ ਇਹ ਸੁੱਖ ਆਤਮਾ ਦਾ ਇਹ ਦੋਹਾਂ ਦਾ ਇਹ ਸੁੱਖ ਫੇਫਗਰੀ ਦਾ ਉਹ ਟੈਂਪਰੇਰੀ ਵੇਫਗਰੀ ਹੈ ਪਰਮੰਡਰ ਵੇਫਗਰੀ ਹੈ ਹਾਂ ਇਹਦਾ ਟੈਂਪਰੇਰੀ ਵੇਫਗਰੀ ਹੈ ਪਰਮੰਡਰ ਵੇਫਗਰੀ ਹੈ ਤੁਹਾਨੂੰ ਦਾ ਸਮੋਹਨਾ ਐਸਾ ਪ੍ਰਭ ਤਿਆਗ ਅਗਰ ਥੱਤ ਲਾਗੋ ਗੁਰਪ੍ਰਸਾਦ ਨਾਲ ਮਲ ਜਾਗੋ ਐਸਾ ਪ੍ਰਭ ਤਿਆਗ ਐਸਾ ਪ੍ਰਭ ਹੈ ਜਿਹੜਾ ਔਰ ਐਸਾ ਪ੍ਰਭ ਕਿੱਥੋਂ ਆਇਆ ਸਾਰਾ ਬੋਧਾ ਆਖਰੀ ਸਾਰੇ ਗੱਲਾਂ ਨੂੰ ਦੱਸ ਕੇ ਐਸਾ ਐਸਾ ਫਰਮ ਤੇ ਆ ਬਰਕਤ ਉਹ ਕਿੱਥੇ ਲੱਗਿਆ ਆ ਉਹ ਕੀ ਚਾਹੀਦਾ ਕਿਤਾ ਕਿਦੇ ਚੁੜ ਰਹੇ ਨੇ ਉਸੇ ਤੇ ਹੋਰੇ ਲੱਗੇ ਨੇ ਜੀ ਚੱਲਦੀ ਹੋਰ ਕਿਦੇ ਲੱਗਿਆ ਦਸੂ ਦਸੂ ਤੇ ਹੋਰ ਲੱਗੇ ਨੇ ਕੋਈ ਆਪਣੇ ਪੁਲਿਸ ਵਾਲੇ ਨੂੰ ਵੀ ਕਿਤੇ ਰੋਕੇ ਇਹ ਕਾਇ ਉਹਨਾਂ ਨੂੰ ਰਹਿ ਗਿਆ ਜੋ ਪ੍ਰਸਾਦ ਨਾਲ ਕਮਨ ਜਾਂਦਾ ਆ ਭੁੱਖਾ ਭੁੱਖਾ ਜਿਉਂ ਹੀ ਫੈਲਦੇ ਸੀ ਮਾਇਆ ਵੀ ਉਹ ਨਹੀਂ ਕਰਦੀ ਪ੍ਰਦਾਨ ਵੀ ਉਹ ਤੇ ਉਹਨਾਂ ਨੂੰ ਸੰਬੋਧਨ ਕਰਕੇ ਸਾਰੀ ਗੱਲ ਠੀਕ ਹੈ ਤੁਸੀਂ ਪ੍ਰਦਾਨ ਕਰਦੋਂ ਕਰੋ ਪਰ ਜੀ ਕਿਰਪਾ ਨਾਲ ਜਿਹਦੇ ਨਾਮ ਨੂੰ ਤੁਹਾਡੇ ਕੋਲ ਚੱਲ ਕੇ ਮਾਇਆ ਆਉਂਦੀ ਹੈ ਉਹ ਕੀ ਕਰਦੇ ਹੋ ਉਹ ਸੱਚ ਤੋ ਤਾਂ ਖਰਾਬ ਹਮਤੁ ਹੈ ਉਹ ਤਾਂ ਤਿਆ ਗਿਆ ਹੋਇਆ ਉਹ ਜਿਹੜੀ ਆਪਾ ਕਹਿ ਰਹੇ ਆਂ ਵੀ ਤਨਖਾਹ ਸੱਚੀ ਪਜਾਰ ਜੂਠਾ ਹੋਈ ਇੱਕ ਗੱਲ ਸੀ ਪਾਗਾਨੀ ਆਪਣੈਲੀ ਵਰਤੇ ਕਰਦੇ ਸੀ ਨਾ ਫਿਰਦੀ ਕਰਦੇ ਸੀ ਹਰ ਗੁਰੂ ਵਰਤ ਤੇ ਬੁਢਾ ਅੰਤੋ ਮੈਂ ਜਿਆਦਾ ਵੇਲੇ ਦੇ ਜੀਰੋ ਸਿੱਧੀ ਸਿੱਧੀ ਗੱਲ ਕਰ ਸਰਦਾਰ ਸੋ ਗੁਰੂ ਗੰਗੂਰੇ ਗੁਰਦਵਾਰਾ ਤੁਮੇ ਗਾਉਂਦੇ ਕਾਏ ਗਏ ਬਸ ਸਿੱਧਾ ਨਹੀਂ ਕਿਹਾ ਜਨਰਲ ਤਰੀਕੇ ਨਾਲ ਗੱਲ ਕਰ ਗੁਜਰਾਣੀ ਗੱਲ ਕਰਦੇ ਕਲ ਕਰ ਹਾਂਜੀ ਆਪ ਜਪਾਏ ਜਪ ਕੇ ਇਹ ਹੈ ਪਿਛਲੀ ਜਿਹੜੀ ਪੰਕਤੀ ਹੈ ਇਹ ਸਰ ਤੋਂ ਸਿੱਖ ਮਤ ਵਾਲੇ ਬੰਦੇ ਨੇ ਬਾਕੀ ਦੇ ਦੂਰੇ ਬੰਦੇ ਹੀ ਇਹ ਹੈ ਜਦ ਕਾਲ ਦੁਰ ਉਹ ਤਾਂ ਮੰਦਿਰ ਲੈਣੀ ਆਉਂਦੀ ਉੱਧਰ ਤਾਂ ਕਿਸੇ ਹੋਰ ਬਸਾਈ ਤੇ ਜੇ ਕਿਰਪਾ ਨਾਲ ਤੁਸੀਂ ਕਾਨੂੰਨ ਆਉਂਦਾ ਜੀ ਇਹ ਗੱਲ ਕਿਤੇ ਸਿਆਸਤ ਨਹੀਂ ਚੱਲੋ ਮਾਇਆ ਦੀ ਗਲਤ ਹੈਗੀ ਹੈ ਸਾਥੀ ਕੋੜਿਆਂ ਦੀ ਗਲਤ ਵੀ ਹੈਗੀ ਹੈ ਉਹ ਚਲੋ ਵੀ ਉਹ ਐ ਕਹਿੰਦੇ ਜੀ ਦੀ ਕਿਰਪਾ ਨਾਲ ਮਿਲੇ। ਕੋਈ ਨਾ ਇਹ ਜੀ ਕਹਿੰਦੇ ਵਿੜੇ ਤਾਂ ਕਹਿੰਦੇ ਨੇ। ਸਾਨੂੰ ਜਨਮ ਦੇ ਤਾ ਸਾਡੇ ਘਰ ਮਾਇਆ ਦੇ ਕੀ ਉਹਦੀ ਕਿਰਪਾ ਨਾਲ ਜਿਹੜੇ ਉਹ ਐਹ ਜਾ ਕਰ ਦਿੱਤਾ। ਉਹ ਤਾੜ ਢੋਲਾ ਆਪਾਂ ਥੋੜੇ ਜਿਹਾ ਢੂੰਗਾ ਹੱਦ ਕਰ ਲਿਆ। ਕਰਦੇ ਰਹਿਣਗੇ ਚਲੋ ਬੋਲਿਆ। ਆ ਕਾਰਨਾ ਵਾਲੀ ਗੱਲ ਫਿਰ ਉੱਥੇ ਕਿਉਂ? ਉਹ ਕਰੁਣਾ ਵਾਲੀ ਗੱਲ ਕਰਦੇ ਸੀ। ਪੱਡਦਾ ਬਿਲਕੁਲ ਨਹੀਂ ਕਰਦਾ ਬਿਸ਼ੂ ਦਾ ਬਿਲਕੁਲ ਨਹੀਂ ਕਰਦਾ ਇਹ ਕਰਦਾ ਜੋਗੀ ਜੋਗੀ ਦਾ ਨਹੀਂ ਕਰਦਾ ਜੋਗੀ ਦਾ ਗਾਮ ਲੈਂਦਾ ਜੋਗੀ ਦਾ ਨਹੀਂ ਕਰਦਾ ਆਪਣੇ ਖਾਂਡੂੜੀ ਆ ਉਹ ਦਾ ਲੋਕਾਂ ਦਾ ਘਰ ਬੁਸਤੇ ਲਿਆਉਂਦਾ ਨਾ ਜੋਗੀ ਦਾ ਲਗੂਂਦੀ ਹੈ ਨਾ ਬੜਦਾ ਦਾ ਲਗੂਂਦੀ ਹੈ ਉਹ ਹਾਂ ਤੇ ਲਗੂਂਦੀ ਹੈ ਨਾ ਬੁੱਲਾ ਦੇ ਲਗੂਂਦੀ ਹੈ ਇਹ ਲੱਗੂ ਆਪਣਾ ਤਨ ਕਰਾਂ ਫਿਰ ਹੁੰਦੀ ਹੈ ਚਲ ਉਹਦਾ ਆਉਂਦੀ ਹੈ ਗੁਰੂ ਸੀ ਉਹ ਵੇਹਰਾਂ ਨੂੰ ਜਾਂਦੀ ਸੀ ਆਪੂ ਘਰ ਸੀ ਉਹਨਾਂ ਤੇ ਆਪ ਹੀ ਅਰੇ ਤਾਂ ਕਿੰਨੇ ਜਨਾ ਨਹੀਂ ਆਪੇ ਇਹ ਗੁਰੂ ਜਿਹੜਾ ਬੈੰਦਾ ਸੀ ਨਦੀ ਤੇ ਮਤਲਬ ਸਤਗੁਰੂ ਦੇ ਹਿਸਾਬ ਨਾਲ ਉਹ ਘੱਟ ਪੌਂਦੇ ਤਾਂ ਰੂਹ ਦਾ ਤਾਂ ਖਾਵਾ ਜਾਲ ਥੋੜੇ ਥੋੜੀ ਹੂਠੇ ਪੌਂਦੇ ਰਹੇ ਤੇ ਗਲੀਆਂ ਆਉਂਦੇ ਰਹਿੰਦੇ ਪਾਪਾ ਤੇ ਅਜੇ ਜੀਰੇ ਜੱਗ ਨਾ ਉਦੀ ਉਹ ਤਾਂ ਦਿਖਾਵਾ ਜਿਆਦਾ ਕਰਦੇ ਸੀ ਜਿਆਦਾ ਕਰਦੇ ਨੂੰ ਸੱਚ ਦਿਖਾਵਾ ਉਹਦਾ ਵੀ ਜਿਆਦਾ ਵੀ ਲੋਕ ਆਦਮੀ ਉਹਨੂੰ ਵੀ ਥੋੜੇ ਮੈਸੇਂ ਚੜਦਾ ਜਿਆਦਾ ਨਹੀਂ ਸਾਲੀ ਜਦਾ ਅਮੀਰ ਹੂ ਜਦ ਹੀ ਉਹ ਕੋ 1 ਕਰੋੜ ਦੀ ਹੋ ਉਹਨੂੰ 100 ਰੁਪਏ 50 ਰੁਪਏ ਦੇ ਮਦਦ ਕਰ ਨਾਲ ਖੜੇ ਬੀ ਜਾਂਦਾ ਗੁਰਪ੍ਰਸਾਦ ਨਾਨਕ ਮਨ ਜਾਗੂ ਜੋ ਆਪਣੇ ਕੀ ਆਲਦ ਜਾਂ ਅ ਜਾਂ ਜੀ ਤੇ ਪਹੁੰਚ ਜਾਣਾ ਅਗਲਾ ਹੋਊਗਾ ਆਪਣੇ ਜਾ ਕੇ ਦੇਖ ਜੋ ਮੈਂ ਕਿਹਾ ਅਜੋ ਕਹਿ ਜੇ ਰਾਗਿਆਨ ਦਾ ਸੇਖ ਇਹਦੇ ਧਿਆਨ ਨਾਲ ਜਾਗ ਤੂੰ ਇਹ ਜਿਹੜਾ ਜੇ ਤੂੰ ਜੋ ਵੀ ਪ੍ਰੋਤਾਨ ਕਰਦਾ ਹੈ ਤੂੰ ਕਿਥੋਂ ਲੈ ਕੇ ਆਦੀ ਆਦੀ ਕੋੜੇ ਦੇ ਇੱਕ ਬੋਝ ਕੇ ਆਪਣੇ ਅੰਦਰ ਤਿਆਗ ਪੜਾਏਗੀ ਨਾ ਇਹ ਕੋਈ ਹੈ ਜੇ ਇਹ ਤੋਂ ਗਿਆਨ ਲੈ ਲਿਆ ਫਿਰ ਤਬ ਜਾਗ ਪਿਆ ਤਬ ਬਸ ਤੱਕੂਗਾ ਵੀ ਰਸਾ ਠੀਕ ਹੈ ਜੇ ਠੀਕਾ ਤਾਂ ਜਾਓ ਪਿਆ ਜੇ ਬਬਲੂ ਸੱਚ ਬਹਿ ਗਿਆ ਤਾਂ ਜੇ ਗੱਲ ਸਮਝ ਕੇ ਨਾਲ ਹੀ ਹਰ ਚੀਜ਼ ਦੇ ਪਿੱਛੇ ਜਾਓਂਗੇ ਤੈਨੂੰ ਪ੍ਰਾਪਤਤਾ ਕੋਈ ਨਹੀਂ ਕਿਰਪਾ ਹੀ ਆ ਉਹਦੇ ਪਿੱਛੇ ਕੰਮ ਕਰ। ਦਾਤ ਮੰਗਦੇ ਨੇ ਤੂੰ ਹੀ ਆ ਕਿਹ ਗੱਲ ਕਰੀਏ ਤੇ ਕਹਨਾ ਦੂਹ ਭੂਗ ਉਸ ਆਦਮੇ ਵੀ ਦਾਤ ਮੁਝੇ ਹੀ ਆਨੋ ਇਹਨਰ ਪਰ ਓਏ ਤਾਂ ਰੋਗਾਂ ਜੋ ਇਹ ਰੋਗਾਂ ਜੇ ਕਿਰਪਾ ਮਨੁਲੀ ਤਾ ਰੋਗ ਦੇ ਵੱਜ ਜਾਓਗੇ ਇਹ ਦੀ ਢਾਲ ਦਿੱਤੀ ਹੈ ਤੋਂ ਜਿਹੜੀ ਇਹ ਦੁੱਖ ਉੱਤੇ ਢਾਲ ਦੀ ਲੋਡਿੰਗ ਹੈ ਤੁਹਾਨੂੰ ਉੱਤੇ ਦਾ ਜਿਆ ਮੀਠਾ ਲੱਗੇ ਹਾਂ ਹਾਂ dokhde vich demo do puzika dilore di da ਬਹੁਤ ਕੁਝ ਕਰਕੇ ਜੀ ਮਿਲੀ ਹੈ ਕੋਈ ਨੋਖੇ ਸਿੱਧੀ ਹੈ ਜੇ ਕੋਈ ਹਾਂ ਆ ਨਾ ਰੋ ਸਾਹ ਹੈ ਚੌਕ ਹੈਗਾ ਹੀ ਆ ਸੱਜਾ ਦਾ ਜੇਰਾ ਕੀ ਆ ਵਿਛਾ ਲਾ ਕੇ ਅਬ ਹਮ ਜੀਆ ਨਾਮ ਪਦਾਰਸ ਨਾ ਨਾ ਮੋਗੇ ਲੱਗਦਾ ਇਹ ਦੁੱਖ ਜੀ ਤੁਸਾਂ ਦੋ ਵੇਰ ਆ। ਉਹ ਹੱਲ ਮਾਦ ਨਹੀਂ ਹੋਵੇ ਨਾਮ ਦੇ। ਪਰ ਕੰਨ ਨਾਮ ਤੋਂ ਜਦੋਂ ਦੁੱਖ ਕੀ ਦੁੱਖ। ਦੁੱਖ ਬਾਗੇ ਦੁੱਖ ਵਰਦਾ। ਹਾਂ? ਦੇ ਲੋੜ ਇਹਨਾਂ ਨੂੰ ਹੁੰਦਾ ਹੀ ਆ ਦੁੱਖ ਚ। ਹਾਂ ਦੁੱਖ ਪਹਿਲਾਂ ਹੀ ਪਹਿਲਾਂ ਜਾਂਦਾ ਜਿਵੇਂ ਜਾਨ ਕਾਇਨਾਤੀ ਇਹ ਦਾਹ ਕਟੇ ਰਿਹਾ ਤਾਂ ਪਹਿਲਾਂ ਯਾਦਦਾ ਦੁੱਖ ਦਾ ਛੇਤੀ ਜਾਂਦਾ ਸੰਭੈ ਨਹੀਂ ਤਾਂ ਦਰੂਦ ਤਾਂ ਆਹੀ ਗਿਆ ਦੁੱਖਦਾਰ ਨੂੰ ਨਾ ਨਾ ਦੁੱਖ ਮੈਨੂੰ ਸਭ ਕਹਾਂ ਰਾਹ ਵਧੀਆ ਸੁੱਖਾ ਸਮਾਂ ਔਖਾ ਰਾਹ ਸੁਖਾੜਾ ਸੁਖਾਣਾ ਰਾਹ ਫਰੰਦਾ ਈਪਲੋ ਦਾ ਦੁਖਾਰੇ ਰਾਜ ਮੁਸਰਵਤ ਲੀਤੇ ਹੁਣੋਂ ਔਖਾ ਦੁਖਾਰੇ ਰਾਜ ਨੇ ਜੀ ਗਈ ਸਿੱਦੇ ਹੀ ਜੀ ਤੇ ਸਿੱਦੇ ਯੋਗਨਾਂ